ਸਤਿਕਾਰਯੋਗ ਸਤਗੁਰੂ ਜੀ ਦੀ ਸਾਰੀਓ ਸਾਥ ਸੰਗਤ ਇਹ ਇੱਕ ਕਲਾਸੀਕਲ ਆ ਰਾਗ ਕੀਰਤਨ ਇਹ ਨਾ ਸੱਤਾ ਬਲਵੰਤਾ ਬਲਵੰਦੇ ਰਸਦੇ ਤੇ ਨਾ ਇਹ ਸਾਡੇ ਕੋਲ ਚੀਜ਼ ਆਉਂਦੀ ਜਦੋਂ ਰੁੱਸ ਗਏ ਨਾ ਫਿਰ ਸੱਚੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਬੜੇ ਤਰਲੇ ਕੀਤੇ ਉਹਨਾਂ ਦੇ ਚਲੇ ਗਏ ਫਿਰ ਗੁਰੂ ਨਾਨਕ ਦੇਵ ਤੱਕ ਚਲੇ ਗਏ ਨਹੀਂ ਸਾਡੇ ਜਦੋਂ ਕਹਿੰਦੇ ਸਿਮਟ ਵਿੱਚ ਹੀ ਰਹਿ ਜਾਓ ਗਾ ਅੱਗੇ ਵਧਿਓ ਨਾ ਜਦੋਂ ਦਿਮਾਗ ਨੂੰ ਪਾਰਾ ਚੜਿਆ ਹੋਵੇ ਫਿਰ ਕਿੱਥੇ ਖਲਾਉਂਦੇ ਆ ਫਿਰ ਗੁਰੂ ਨਾਨਕ ਧੱਕ ਚਲੇਗੇ ਕਹਿੰਦਾ ਉਹ ਤੇਰੇ ਗੁਰਨਾਨਕ ਦੀ ਸਾਡੇ ਮਰਦਾਨੇ ਨੇ ਬਣਾ ਛੱਡੀ ਸੱਚੇ ਬਾਸ਼ਾ ਫਿਰ ਸਰਾਦਤਾ ਦਾ ਜਾਓ ਤੀ ਫਿੱਟ ਗਿਆ ਤੁਹਾਨੂੰ ਕੋੜ ਹੋ ਜੇ ਮੈਂ ਹੀ ਗੁਰਨਾਨਕ ਦੀ ਗੱਦੀ ਤੇ ਹੋਵਾਂ मेरे सामने ਤੂੰ ਹੀ ਉਹਦੀ ਨਿੰਦਿਆ ਕਰੋ ਜਿਉ ਤਨ ਕੋੜ ਪੈਜੀ ਰੋਏ फिर, ਸੱਚੇ ਪਾਤਸ਼ਾਹਾਂ ਪਰ ਸਿੱਖਾਂ ਨੂੰ ਫਿਰ ਇਕੱਠਿਆਂ ਕੀਤਾ ਆਜੋ ਫਿਰ ਹੁਣ ਇਕੱਠਿਆਂ ਕਰ ਲਿਆ ਫਿਰ ਆਜੋ ਹਣ ਹਰ ਜੀ ਸੱਚੇ ਪਾਤਸ਼ਾਹ ਕਹਿੰਦੇ ਹੀ ਮੈਂ ਉਹ ਕਹਿੰਦਾ ਹਾਂ ਸਰੰਦਾ ਲੱਭ ਜਾਵੇ ਪਰ ਲੱਭਾ ਨਹੀਂ ਆ ਸਾਨੂੰ ਸੰਤ ਜੀ ਇਹ ਕਰਮ ਦੀ ਗੱਲ ਹੁੰਦੀ ਆ ਕਰਮ ਬੰਦੇ ਦੇ ਨਾਲ ਆ ਇਹ ਕਿਸੇ ਤਰ੍ਹਾਂ ਕੋਈ ਬੰਦਾ ਨਹੀਂ ਕਰ ਸਕਦਾ ਕਲਾਸੀਕਲ ਆ ਜਗਾਦਰੀ ਵਾਲਾ ਵੀ ਇੱਥੇ ਆਇਆ ਸੁਣਿਆ ਆ ਸੰਤ ਜੀ ਨਹੀਂ ਪਾਰੇ ਹੋ ਜੁਰੀ ਰਾਗੀ ਜਿਹੜੇ ਹਰਮੰਦਰ ਸਾਹਿਬ ਦੇ ਆਏ ਨਾ ਭਾਈ ਨਰਮਨ ਸਿੰਘ ਉਹਨੇ ਰਾਗਾਂ ਦੇ ਵਿੱਚ ਕੀਰਤਨ ਕੀਤਾ ਆ ਉਹ ਜਗਦੀ ਵਾਲਾ ਦੋ ਆਜੋ ਜੀ ਛਤ ਨਾਮ ਜੀ ਆਜੋ ਪੰਡਤ ਜੀ ਸਾਰੀ ਉਮਰ ਨਾ ਆ ਰਹਾ ਕੀਰਤਨ ਨਹੀਂ ਵਜਾ ਵਾਜਾਂ ਨਹੀਂ ਆਇਆ ਮੇਰੇ ਮਨ ਤੇ ਪੰਡਰੀ ਕਹਿੰਦੇ ਤੇ ਕਹਿੰਦਾ ਮੈਨੂੰ ਤੇ ਉਦੋਂ ਹੀ ਪਤਾ ਲੱਗਦਾ ਸੱਚੇ ਪਾਤਸ਼ਾਹ ਐ ਹੀ ਕਹਿ ਦਿੰਦੀ ਐਵੇਂ ਮੈਨੂੰ ਪਤਾ ਲੱਗਦਾ ਆ ਪਰ ਮੈਨੂੰ ਕੁਝ ਨਹੀਂ ਪਤਾ ਲੱਗਦਾ ਪਰ ਬਈ ਉਹ ਦਾ ਦੋ ਦੋ ਚਾਰ ਚਾਰ ਮਿੰਟ ਕਰਕੇ ਕਹਿੰਦੇ ਅਸੀਂ ਬਲਜੀਤ ਜੀ ਜਿਹੜੇ ਸਾਡੇ ਖਾਪੜ ਖੇੜੀ ਵਾਲਿਆਂ ਨੇ ਜੀ ਐਡੇ ਐਡੇ ਸਾ ਜਦੋਂ ਸਾਡੇ ਸ਼ਹੀਦਾਂ ਦੇ ਉੱਤੇ ਉਹ ਸ਼ਬਦ ਪੜ੍ਹਦੇ ਹੁੰਦੇ ਸਾਰੂ ਜੀ ਜੀ ਸੇ ਜੀ ਕਹਿੰਦੇ ਪ੍ਰਤਾਪ ਸਿੰਘ ਜੀ ਨੇ 3 ਸਾਲ ਦੇ ਵਿੱਚ ਇਹਨੂੰ ਮੈਂ 1 ਸਾਲ ਦੇ ਵਿੱਚ ਸਿਖਾਈ ਹੈ ਸਾਲ ਦੇ ਵਿੱਚ ਇਹ ਰਾਗ ਜਿਹਨੂੰ ਆ ਜਾਵੇ ਸਰੂਜੀ ਸਗੇ ਸੱਚੇ ਬਾਸ਼ਾ ਨੇ ਅੱਗੇ ਸਾਡੇ ਇੱਕ ਦੋ ਰਾਗੀ ਹੁੰਦੇ ਸਨ ਹੁਣ ਜਿਤਨਾ ਕਹਿੰਦੇ ਆ ਨਾ ਅੰਬਰ ਅੰਬਰ ਇੱਕ ਅੰਬਰੀਲਾ ਦਾ ਰਾਗੀਆਂ ਦਾ ਕੋਈ ਰਹਿ ਨਹੀਂ ਨੇ ਹਾਂਜੀ ਸੋਈ ਸੇਖ ਮੇਰਾ ਉਹ ਸੱਭ ਮੈਂ ਉਸ ਕਾ ਮਹਾਨ ਸੱਚੇ ਬਾਦਸ਼ਾਹ ਇੱਕ ਨਵੇਂ ਕਲੀ ਪਛਾਣ ਬਣਾਈ ਉਹਨਾਂ ਨੇ ਪਤਾ ਲੱਗਾ ਜਦੋਂ ਦਿੱਲੀ ਦੇ ਵਿੱਚ ਕੋਈ ਸਿੱਖ ਨਹੀਂ ਲੱਭਾ ਸਤਿਗੁਰਾਂ ਦਾ ਸੀਸ ਠਾਉਣ ਵਾਸਤੇ ਧੱਟ ਔਣ ਵਾਸਤੇ ਸਤਿਗੁਰਾਂ ਨੇ ਫਿਰ ਖਾਲਸਾ ਪੰਥ ਸਾਜਿਆ ਸੇਕਾ ਹੋਏ ਸਾਨੂੰ ਪਹਿਲਾ ਕਹਿੰਦੇ ਨਵਕਲੀ ਪਛਾਣ ਬਣਾਉਣੀ ਆ ਜਿਹੜਾ ਲੱਖਾਂ ਦੇ ਵਿੱਚ ਹੀ ਦਿਸੇ ਮਰਾ ਖਾਲਸਾ 사ਤਗੁਰਾਂ ਨੇ ਦੇਨੇ ਮقرਰ ਕਰ ਰਿਆ ਵਿਸਾਖੀ ਦਾ ਚਿੱਠੀਆਂ ਆ ਪਾਦਤੀਆਂ ਪੰਜ ਕਿਲੇ ਨੇ ਅਨੰਦਪੁਰ ਸਾਹਿਬ ਅਕਾਲਗਾੜ੍ਹਿਆ ਜਿੱਥੇ 사ਤਗੁਰਾਂ ਨੇ ਚਿੱਠੀਆਂ ਲਿਖ ਕੇ ਪਾਈਆਂ ਜਿਠੀਆਂ ਪਾਰ ਦੀਆਂ ਵਿਸਾਖੀ ਵਾਲੇ ਦਿਨ ਕੋਡ ਸ਼ਾਹਤਰ ਮਾਇਆ ਜੋ ਵੀ ਆ ਸਾਰੇ ਸਿੱਖੋਂ ਉਥੇ ਲੈ ਕੇ ਆਉਣ ਮੈਂ ਖਾਲਸਾ ਬਣਾਉਣਾ ਆ ਨਾਲੇ ਮੈਂ ਕਿੜਾ ਪ੍ਰਸ਼ਾਸਕ ਆਉਣਾ ਆ ਸਾਗੁਰਾ ਨੇ ਉਸ ਵਕਤ ਧਿਆਨ ਦਾ ਸਵਾ 1100 ਰੁਪਏ ਦੀ ਦੇ ਕਰਾਈ ਸੀ ਉਸ ਸਮੇ 1699 ਦੇ ਵਿੱਚ ਸਾਗੁਰ ਜੀ ਨੇ ਇੱਕ ਉੱਚੀ ਟੀਬੀ ਦੇ ਉੱਤੇ ਕਨਾਵ ਲਵਾ ਦਿੱਤੀ ਆ ਤਿੰਨ ਦਰਵਾਜ਼ੇ ਬਣਾ ਦਿੱਤੇ ਆ ਪਹਿਲੇ ਤੇ ਲਿਖਿਆ ਆ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸੇਰ ਗਲੀ ਮੇਰੀ ਆਓ ਸਿੱਖ ਲਗਦੇ ਕਹਿੰਦੇ ਕਿਹਦੇ ਤੇ ਤੇ ਹੋਰ ਕੁਝ ਲਿਖੀ ਫਿਰਦਾ ਤੇ ਦਰਵਾਜੇ ਦੇ ਅੱਗੇ ਦਾ ਕਿ ਦੂਜੇ ਥਾਣੀ ਚਲੇ ਜਾਨੇ ਆ ਉੱਥੇ ਲਿਖਿਆ ਸੀ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਜਿਵੇਂ ਲਿਖਿਆ ਸੀ ਖੰਨਿਓ ਤਿੱਖੀ ਤੇ ਵਾਲੋਂ ਨਕੀ ਇਹਦ ਮਾਰਗ ਜਾਣਾ ਸਾਂਜੀ ਬੈਂਗੇ ਨੇ ਜਦੋਂ ਫਿਰ ਸੱਚੇ ਪਾਤਸ਼ਾਹ ਆਏ ਨੇ ਕਵੀ ਕਹਿੰਦਾ ਕਦੀ ਇਉਂ ਵੇਖੇ ਕਦੀ ਇਉਂ ਵੇਖੇ ਤੇਗ ਧੂਲੀ ਮਿਆਂ ਵਿਚੋਂ ਤੰਬੂ ਵਿਚੋਂ ਗਬਿੰਦ ਸਿੰਘ ਬਾਹਰ ਆਵੇ ਜਿਵੇਂ ਸ਼ੇਰ ਬੁਕੇ ਬਿਆ ਬਾਣ ਵਿਚ ਆਗਨੇ ਸਟੇਜ ਤੇ ਖੜ ਗਏ ਨੇ ਤੇਗ ਕਹਿੰਦੇ ਮਨੂ ਇੱਕ ਸਿੱਖ ਦੀ ਸਿਰ ਦੀ ਲੋੜ ਆ ਇਹਦੇ ਕਹਿੰਦੇ ਸੀ ਕੜਾ ਪ੍ਰਸ਼ਾਦ ਸ਼ਿਕਾਉਣਾ ਆ ਇਹਦਾ ਸਿਰ ਮੰਗਲ ਆ ਪਿਆ ਹੈ ਹੌਲੀ ਹੌਲੀ ਖਿਸਕਣ ਲੱਗ ਪਿਆ ਭਾਈ ਦਇਆ ਆਨੰਦ ਖੱਤਰੀ ਲਾਹੌਰ ਵਾਸੀ ਉਠਿਆ ਆ ਇੰਦਾ ਗਰੀਬ ਨਿਵਾਜ ਸਿਰ ਹਾਜ਼ਰ ਹੈ ਦਾਸ ਦਾ ਸੱਚੇ ਬਾਸ਼ਾ ਤੰਬੂਜ ਲੈ ਗਏ ਨੇ ਮਾਰੀ ਕਿਰਪਾ ਨਾਲ ਸਿਰ ਧੜ ਤੋਂ ਜੁਦਾ ਕਰ ਦਿੱਤਾ ਆ ਰਗ ਜੇਮ ਦਾ ਕਲਿਆ ਜਸੂਸੀਆ ਬੰਦਾ ਸੰਗਤ ਦੇ ਵਿੱਚ ਬੈਠਾ ਆ ਸਭ ਕੁਝ ਦੇਖ ਰਿਹਾ ਆ ਜਦੋਂ ਦੂਜੇ ਆ ਕੇ ਸਿਰ ਦੀ ਮੰਗ ਕੀਤੀ ਹੋਰ ਕਿਸ ਕਰਨ ਲਾਪੇ ਮਾਤਾ ਗੁਜਰੀ ਕੋਲ ਚਲੇ ਗਏ ਮਾਤਾ ਇਹਦੇ ਦਿਮਾਗ ਨੂੰ ਚੰਡੀ ਚੜ ਗਈ ਆ ਹਮਨ ਕੀਤਾ ਸੀ ਨਾ ਨੈਣਾ ਦੇਵੀ ਦੇ ਉੱਤੇ ਚੰਡੀ ਚੜ ਗਈ ਇਹਦੇ ਦਿਮਾਗ ਨੂੰ ਚਿੱਠੀਆਂ ਦੇ ਪਾਈਆਂ ਕਿੜਾ ਪ੍ਰਸ਼ਾਸ਼ ਸਿਕਾਉਂਗਾ ਤਾਂ ਸਿੱਖਾਂ ਦੇ ਸਿਰ ਵੱਢਣ ਲਾ ਪਿਆ ਆ ਇਹਦਾ ਕਰੀਏ ਇਨੂੰ ਫੜ ਕੇ ਕਿਸੇ ਅੰਦਰ ਕਬਰੇ ਜੇ ਬੰਦ ਕਰਦੀ ਐ ਤੇ ਵੱਡੇ ਸਹਬ ਜਿਆਦੇ ਨੂੰ ਗੱਦੀ ਤੇ ਬਿਠਾ ਦਈਏ ਜੋ ਮਨ ਆਇਆ ਬੋਲਣ ਲੱਗ ਪਏ ਸੰਤ ਜੀ ਵਾਰੋ ਵਾਰੀ ਸੱਚੇ ਪਾਸ਼ਾ ਨੇ ਪੰਜਾਂ ਦੇ ਸਿਰ ਮੰਗੇ ਧਰਮ ਸਿੰਘ ਆਇਆ ਮੋਗਮ ਚੰਦੇ ਆਇਆ ਹਿੰਮਤ ਸਿੰਘ ਆਇਆ ਸਾਹਿਬ ਚੰਦ ਆਇਆ ਪੰਜਾਂ ਦੇ ਸਿਰਾਂ ਤੋਂ ਧੜ ਕਲਮ ਕੀਤੇ ਫੈਰੋਜੀ ਸੂਸੀਆ ਬੰਦਾ ਡੈਰੀ ਦੇ ਰਾਂ ਰੰਗਜੀਤ ਉਹ ਰੰਗਜੀਤ ਤੂੰ ਕਿਨਾਂ ਮੈਂ ਇਹਨਾਂ ਨੂੰ ਖਤਮ ਕਰ ਦੇਣਾ ਆ ਉਹ ਗੁਰੂ ਕਬਲ ਸਿੰਘ ਨੇ ਸੋਚਿਆ ਹੀ ਨਹੀਂ ਕਿ ਧੜ ਨਾਲੋਂ ਸਿਰ ਲੱਥਾ ਕਿਹਦੇ ਨਾਲ ਜੋੜਾ ਉਹ ਜਿੱਥੇ ਜਿੱਥੇ ਆਇਆ ਉੱਥੇ ਉੱਥੇ ਹੀ ਫਿੱਟ ਕਰੀ ਗਿਆ ਤੂੰ ਇਹਨਾਂ ਨੂੰ ਮਾਰਨੀ ਆ ਸਕਦਾ ਇਹਨੇ ਤਾਂ ਮੁਰਦੇ ਜਿੰਦੇ ਕਰ ਦਿੱਤੇ ਆ ਸਤਜੀ ਫਿਰ ਉਹਨਾਂ ਨੂੰ ਅਮਰਦ ਸ਼ਿਕਾਇਆ ਕਈ ਕਹਿਣਗੇ ਆ ਸਾਨੂੰ ਕਿਦਣਾ ਤੋਂ ਸ਼ੇਰ ਬਣਾ ਦਿੰਦਾ ਉਹ ਜਾਨਵਰਾਂ ਦਾ ਜਾਨਵਰੀ ਬਣਾਇਆ ਕਿੰਦਰ ਤੋਂ ਸ਼ੇਰ ਬਣਾ ਦਿੰਦਾ ਸੱਜੇ ਪਾਸ਼ਾ ਨੇ ਫਿਰ ਪੰਜਾਂ ਨੂੰ ਅਮਰਿਤ ਛਕਾਇਆ ਤਿਆਰ ਕੀਤਾ ਬਾਣੀਆਂ ਪੜੀਆਂ ਤਿਆਰ ਕਰਵਾ ਕੇ ਪਰ ਉਹਨਾਂ ਨੂੰ ਸਿਖਿਆ ਦਿੱਤੀ ਕਿਸੇ ਦੇ ਜ਼ੁਲਮ ਨੀ ਕਰਨਾ ਆਪਣੀ ਰਹਿਤ ਦੇ ਵਿੱਚ ਰਹਿਣਾ ਜਾਂ ਕੀ ਰਹਿਤ ਨਾ ਜਾਣੀ ਹੈ ਗੁਰਮੰਤਰਨੀ ਚੀਜ਼ ਜਿਸ ਦਾ ਖਾਏ ਕੇ ਵਿਸਰੇ ਹਰਸਿਓ ਪ੍ਰੀਤ ਇਹ ਨਹੀਂ ਵੀ ਉੱਥੋਂ ਕੀ ਲੈ ਕੇ ਖਾ ਲੋ ਉੱਥੋਂ ਵੀ ਲੈ ਕੇ ਖਾ ਲੋ ਇੰਦੇ ਜਿੱਹਾਂ ਕਹਾਗਾ ਸ਼ਗੇ ਪ੍ਰਸ਼ਾਦ ਜਿੱਹਾਂ ਕਹਾਗਾ ਸ਼ਗੇ ਪ੍ਰਸ਼ਾਦ ਸਿੱਖ ਨਹੀਂ ਮੇਰਾ ਆ ਜੁਗਾੜ ਉਹ ਮੇਰਾ ਸਿੱਖ ਹੀ ਨਹੀਂਗਾ ਕਿਸੇ ਤੋਂ ਡਰਨਾ ਨਹੀਂ ਨਾ ਕਿਸੇ ਨੂੰ ਡਰਾਉਣਾ ਆ ਕੁਣੀ ਮਾਰ ਨੜੀ ਮਾਰ ਮੀਣੀਏ ਤੀਰਮਲੀਏ ਇਹਨਾਂ ਦੇ ਨਾਲ ਤੁਸੀਂ ਵਰਤਣਾ ਨਹੀਂਗਾ ਹੁਣ ਸੇਕਾ ਖਾਵਾਲੇ ਕਹਿ ਦਿੰਦੇ ਆ ਹੈ ਗੁਰੂ ਨੇ ਕਿਹਾ ਆ ਹਲਾਲ ਨਾ ਖਾਓ ਛਟਕੇ ਦਾ ਖਾਓ ਕਦੇ ਮੂੰਗਦੇ ਸਬਾਰ ਪਏ ਜਵਾਨ ਦੇ ਇਹਨਾਂ ਲੋਕਾਂ ਨੂੰ ਕਰਦੇ ਆ ਆ ਬਦਨਾਮ ਗੁਰੂ ਨੂੰ ਕਰਦੇ ਆ بادشاہ ਕਹਿੰਦੇ ਆ ਕਹਿੰਦੇ ਅਮਰਤ ਪਾਨ ਕਰੇ ਕਸ਼ਪਾਗੇ ਪੰਜ ਕਕਾਰ ਕੀ ਰੈ ਤਰ ਖਾਵੇਂਗੇ ਜੋ మాਸ ਸ਼ਰਾਬ ਕੋ ਪਾਨ ਕਰੇ ਤਰਗ ਆਪ ਕੋ ਸਿੰਘ ਉਹਨਾਂ ਨੂੰ ਦੇ ਕੇ ਸਿੱਕੀ ਕੀ ਆ ਦਸ਼ਮੇਸ਼ ਜੀ ਨੇ ਜਹਾ ਬੰਸ਼ੀਆਂ ਅੱਜ ਤੋਂ ਸਰਦਾਰੀਆਂ ਨੇ ਗੰਗਾ ਫੇਰ ਦੇ ਸਦਾ ਯਾਦ ਰੱਖਣਾ ਤੇ ਕੰਦੀ ਸਿਰਾਂ ਤੇ ਫੇਰ ਨਹੀਂ ਨੇ ਇਹ ਕੜਾ ਤਾਨੂੰ ਦੇ ਦਿੱਤਾ ਆ ਕਿਸੇ ਗਰੀਬ ਦੇ ਹੱਥ ਨਾ ਉੱਠੇ ਇਹ ਕਿਸਮ ਦੀ ਇੱਕ ਕੜੀ ਮਾਰੀ ਗਈ ਆ ਖਸ਼ਹਰਾ ਦਿੱਤਾ ਜੱਟ ਦੇ ਸਤਿਵਾਸ ਦੇ ਕਰਪਾਨ ਦਿੱਤੀ ਆ ਗਰੀਬਾਂ ਦੀ ਸਹਾਇਤਾ ਕਰਨ ਵਾਸਤੇ ਮਜਲੂਮਾਂ ਦੀ ਇਸ ਕਰਕੇ ਇਹ ਯਾਦ ਰੱਖਣਾ ਹੈ ਗੁਰੂ ਜਪਣਾ ਆ ਗੁਰੂ ਗੁਰੂ ਜਪੋ ਤੇ ਜਿਹੜਾ ਰਹਿਤ ਵਿੱਚ ਰਹੇਗਾ ਨਾ ਉਹ ਮੇਰਾ ਸਿੱਖ ਆ ਮੈਨੂੰ ਰਹਿਤ ਚੰਗੀ ਲੱਗੀ ਆ ਮੈਨੂੰ ਪਿਆਰੀ ਚੰਗੀ ਆ ਮੈਨੂੰ ਸਿੱਖ ਨਹੀਂ ਆ ਪਿਆਰਾ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ ਮੈਨੂੰ ਸਿੱਖ ਨਹੀਂ ਪਿਆਰਾ ਲੱਗਦਾ ਮੈਨੂੰ ਰਹਿਤ ਪਿਆਰੀ ਲੱਗਦੀ ਆ ਸਾਰੇ ਕੋ ਧੰਨ ਸਤਿਗੁਰੂ ਜੀ ਜੀਤ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਦੇ ਵਿੱਚ ਰਹਿੰਦਾ ਹੈ ਦੇ ਵਿੱਚ ਰਹਿੰਦਾ ਆ ਬੜਾ ਚੰਗਾ ਲੱਗਦਾ ਤੇ ਸਤਿ ਜੀ ਅਸੀਂ ਨਹੀਂ ਰਹਿੰਦੇ ਹੁਕਮ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਆ ਜਦੋਂ ਬੱਚਾ ਜਨਮ ਲੈ ਲੀਂਦਾ ਉਸ ਬੱਚੇ ਦੇ ਹੋਸ਼ ਸੰਭਾਲਣ ਤੱਕ ਉਹਦਾ ਮਾਂ ਬਾਪ ਜਿਹੜਾ ਨਾ ਪਿਤਾ ਮਾਤਾ ਉਹ ਭਜਨ ਕਰੇ ਉਹਨੇ ਚਿਰ ਉਹਦਾ ਜਦੋਂ ਹੋਸ਼ ਮਹਾਲੂ ਕਾਕਾ ਇੰਨਾ ਚਿਰ ਤੇਰੇ ਨਾਂ ਦਾ ਹਣੋਂ ਭਜਨ ਕਰਦਾ ਹੋਂ ਤੂੰ ਹੋਸ਼ ਸੰਭਾਲ ਲਈ ਆ ਹੋਂ ਭਜਨ ਕਰ ਤੂੰ ਪਰ ਨਹੀਂ ਹੁੰਦਾ ਨਹੀਂਗਾ ਅਗਰ ਗੰਦਿਆ एक ਪਾਠ ਆਦ एक ਇੱਕ ਦਸਮ ਦਾ ਹਰ ਘਰ ਦੇ ਵਿੱਚ ਹੋਣਾ ਚਾਹੀਦੀ ਆ ਚਾਹੀਦਾ ਤੇ ਤੇ ਹਰ ਘਰ ਦੇ ਵਿੱਚ ਸੰਗੀਤ ਦੀ ਮਨੁਖਸ਼ਬੂ ਆਉਣੀ ਚਾਹੀਦੀ ਦਸਵੰਦ ਕਢੋ ਸਤਿਗੁਰੂ ਦਾ ਸਾਹ ਸੰਗਤ ਦਾ ਸਵੰਦ ਨਾ ਭੁੱਲਿਓ ਦਸਵੰਦ ਦੇਈ ਜਾਓ ਜਿੰਨਾ ਤੁਹਾਡੇ ਕੋਲ ਨਿਕਲਦਾ ਦਸਵੰਦ ਦੇ ਦਿਓ ਗੁਰੂ ਜੋ ਕਹਿੰਦਾ ਉਹ ਕਰੋ ਜੋ ਕਰਦਾ ਉਹ ਨਾ ਕਰੋ ਘਰ ਕੇ ਆਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਜੋ ਕਹਿੰਦਾ ਗੁਰੂ ਉਹ ਕਰੋ ਜੋ ਕਰਦਾ ਉਹ ਨਹੀਂ ਕਰਨਾ ਉਹ ਸਤਿਗੁਰੂ ਆ ਸਮਰਾਥ ਆ ਸੋ ਸਾ ਸੰਗਤ ਇਹ ਪੰਜ ਪਿਆਰੇ ਸਾਜ ਗੁਰੂ ਗਬੇਰ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਆ ਰਹਿਣੀ ਰੈ ਸੋਈ ਸਖ ਮੇਰਾ ਉਸ ਹੈ ਮੈਂ ਉਸ ਚਿਹਰਾ ਮੈਂ ਉਹਦਾ ਚਿਹਰਾ ਹੋਊਗਾ ਜਿਹੜਾ ਰਹਿਣੀ ਦੇ ਵਿੱਚ ਰਹੂਗਾ असी ਫਤੇਗੜ ਸਾਹਿਬ तो नगर ਕੀਰਤਨੇ ਕਰਕੇ ਗਏ ਸੱਚੇ ਪਾਤਸ਼ਾਹ ਨੂੰ ਸੱਜਿਆ ਉੱਥੇ ਭੈਣੀ ਸਾਹਿਬ ਗਏ ਦੁਪਹਿਰ ਦਾ ਨਿਤਨੇਮ सी ਤੇ ਜਦੋਂ ਨਿਤਨੇਮ ਵੜਕੇ ਅਰਦਾਸ ਹੋਣ ਲੱਗੀ ਸੱਚੇ ਪਾਤਸ਼ਾਹ ਖਲੋਤੇ ਇੱਕ ਸਾਡੀ ਉੱਥੇ ਲੜਕੀ ਸੀ ਚੰਡੀਗੜ੍ਹ ਦੀ ਸਾਡੇ ਸੁਭਾਜੀ ਦੀ ਭਤੀਜੀ ਸੀ ਉਹਨੇ ਚੂੜੀ ਦਾ ਸੁਤਨભાઈ ਉਹਦੀ ਚੂੜੀ ਸੱਚੇ ਬਾਸ਼ਾ ਜੀ ਜਦੋਂ ਧਿਆਨ ਉਹਦੇ ਵੱਲ ਵੀ ਕੋ ਬੀਬੀ ਵਾਲ ਕੁੜੀ ਵੱਲ ਸਾਰੀ ਸੰਗਤ ਦਾ ਹਰਾਸ ਸੱਚੇ ਬਾਸ਼ਾ ਧਿਆਨ ਹੀ ਉਹਦੇ ਵੱਲ ਅਰਦਾਸ ਹੋ ਗਈ ਸੱਚੇ ਲੜਕੀ ਨੂੰ ਮੇਰੇ ਕੋਲ ਲਿਆਓ ਧਿਆਨ ਦਾ ਰਸਵਾਲੂngen ਰਸਵਾਲ ਇਹਨੂੰ ਸਟੇਜ ਤੇ ਖਿਲਾ ਵਾਲੀ ਸਟੇਜ ਦੇ ਉੱਤੇ ਖਿਲਾ ਰਿਹਾ ਉਧਰ ਭਾਲ ਜੀ ਨੇ ਕਿਹਾ ਸੱਚੇ ਪਾਸ਼ਾ ਹੁਕਮ ਹੈ ਵੀ ਜਿਹੜੀ ਆ ਚੂੜੀਦਾਰ ਸੁਥਣ ਪਾਉਂਦੇ ਆ ਵੀ ਇਦਾਂ ਦੀ ਪਾਉਣੀ ਚਾਹੀਦੀ ਹੈ ਜਿੱਦਾਂ ਦੀ ਇਹ ਲੜਕੀ ਨੇ ਪਾਈ ਹੈ ਅਸੀਂ ਕਹਿੰਦੇ ਉਹ ਚੂੜੀ ਚੂੜੀ ਸਾਨੂੰ ਦਿਖਣੀ ਨਹੀਂ ਚਾਹੀਦੀ ਹਰਵਾਜ ਬਣ ਗਿਆ ਤੇ ਉਦੋਂ ਚੌਥੇ ਦਿਨ ਐਤਵਾਰ ਸਾਡੇ ਉੱਤੇ ਕੁੜੀ ਕੀ ਨ ਕੀਦਾ ਕੁੜੀ ਪੌਂਜਾਂ ਵਾਲੀ ਸਲਵਾਰ ਪਾ ਕੇ ਆ ਗਈ ਉੱਥੇ ਮੇਰਾ ਧਿਆਨ ਹੋਣੇ ਵਾਲਾ ਮੈਂ ਕਹ ਕੁੜੀਏ ਅੱਜ ਕੀ ਕਰਕੇ ਆਈਆਂ ਮੈਂ ਤੇਰੀ ਦੇ ਐਨੀ ਪੂ ਮੈਂ ਕਾ ਸਾਧ ਗੁਰਨੇ ਤੇ ਤੈਨੂੰ ਤੇ ਚਾਰ ਚਫਰੇ ਸਾਹ ਸੰਜ ਖਲਾਰ ਦਦਾ ਅੱਜ ਤੂੰ ਕੀ ਕਰਕੇ ਆਈ ਹੈ ਪਛਾਹ ਨੂੰ ਜਾ ਕਾਰ ਨੇ ਪਿਛਲੇ ਪਾਸੇ ਹੋਈ ਜਾਵੇ ਕੁੜੀ ਮੈਂ ਹੁਣ ਵੇਖ ਲਿਆ ਸਾਰੇ ਆ ਦਾ ਕੋਈ ਨਹੀਂ ਸੰਤ ਜੀ ਭੁੱਲ ਜਾਂਦੇ ਉਸ ਤਿੰਨ ਵਿਸਾਖੀ ਦੇ ਇਹ ਦਸਮ ਪਾਸ਼ਾ ਨੇ ਪੰਜ ਪਿਆਰੇ ਸਾਜੇ ਉਸ ਤੋਂ ਬਾਅਦ ਸਗੂ ਰਾਸ ਸਜੇ ਪਾਸ਼ਾ ਇਹ 1699 ਤੋਂ ਬਾਅਦ 1850 ਦੇ ਵਿੱਚ ਇਹ ਵਿਸਾਖੀ ਵਾਲੇ ਦਿਨ 사ਦਗੁਰਾਂ ਨੇ ਅੰਮ੍ਰਿਤ ਦੀ ਤਿਆਰ ਕਰਕੇ ਪੰਜਾਂ ਸਿੱਖਾਂ ਨੂੰ ਅਮਰਤ ਦੀ ਦਾਤ ਦਿੱਤੀ ਪਹਿਲੇ ਸਿੰਘ ਸਨ ਸਾਡੇ ਲਾਭ ਸਿੰਘ ਜੀ ਇਹ ਅੱਖਾਂ ਤੋਂ ਅੰਨੇ ਸਨ ਇਹ ਰਾਗੀ ਸਨ ਹਰਮੰਦਰ ਸਾਹਿਬ ਜੋ ਕਾਸ਼ਬਾਣੀ ਹੋਈ ਤੇ ਇਹ ਪਹਿਲੋਂ ਹਜਰੋ ਗਏ ਨੇ ਬਾਬਾ ਬਾਲਕ ਸਿੰਘ ਜੀ ਦੇ ਕੋਲ ਜਿਹੜੇ ਬਾਸ਼ਾ ਨਾਮ ਦੀ ਦਾਤ ਦਾਤ ਬੰਸੋ ਸਤਗੁਰ ਬਾਸ ਸਿੰਘ ਜੀ ਗਿਆ ਉਹ ਨਾਮ ਦੀ ਦਾਤ ਜਿਹੜੀ ਆ ਹੁਣ ਚਲੀ ਗਿਆ ਭੈਣੀ ਸਾਹਿਬ ਭੈਣੀ ਸਾਹਿਬ ਚਲੇ ਜਾ ਗਿਆ ਮਨਾਖਾ ਅੱਖਾਂ ਤੋਂ ਭਾਈ ਲਾਭ ਸਿੰਘ ਰਾਗੀ ਤੇ ਹਜ਼ਰੋਂ ਹੀ ਤੁਰ ਕੇ ਫਿਰ ਭੈਣੀ ਸਾਹਿਬ ਆਇਆ ਅੱਖਾਂ ਤੋਂ ਮਨਾਖਾ ਅੰਨਾ ਸੀ ਅੱਖਾਂ ਤੋਂ ਸਤਗੁਰ ਜੀ ਕੋਲੇ ਆ ਗਿਆ ਭੈਣੀ ਸਾਹਿਬ ਮੰਝਲਾ ਕੱਢਦਾ ਇੱਥੇ ਪਰ ਵਿਸਾਖੀ ਵਾਲਾ ਦਿਨ ਮਿੱਥਿਆ ਸਤਗੁਰਾਂ ਨੇ ਇੱਥੇ ਵੀ ਪੰਜਾਂ ਨੂੰ ਅਮਰਤ ਦੀ ਦਾਤ ਦਿੱਤੀ ਪਾਈ ਲਾਭ रागी ਜੀ ਰਾਗੀ ਦੂਜੇ ਭਾਈ ਕਾਂਸ ਜੀ ਦੀ ਨਾਬਾ ਤੇ ਜੇ ਆਦਮਾ ਸਿੰਘ ਸੀ ਆਲੋ ਮਹਾਰਮ ਵਾਲੇ ਚੌਥੇ ਭਾਈ ਸੁਧ ਸਿੰਘ ਜੀ ਦਰਗਾਪੁਰ ਦੇ ਜਿਲੰਦਰ ਦੇ ਪੰਜਵੇਂ ਸਾਨਾ ਬਾਬਾ ਨੈਣਾ ਸਿੰਘ ਜੀ ਵਿਰਿਆ ਜਲਾ ਅੰਮ੍ਰਿਤਸਰ ਦੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸਤਗੁਰਾਂ ਨੇ ਉਹਨੇ ਪੰਥ ਖਾਲਸਾ ਤਿਆਰ ਕੀਤਾ ਸਤਗੁਰਾਂ ਨੇ ਸੰਤ ਖਾਲਸਾ ਤਿਆਰ ਕਰ ਦਿੱਤਾ ਵਦੀਲੀ ਲੈਣ ਦੀ 95 ਉਹ ਮਰਦ ਸ਼ਿਕਾਇਆ ਸਮਾਂ ਨਿਕਲ ਗਿਆ ਰਹਿ ਦੇ ਵਿੱਚ ਰਹਿਦਾ ਕਹਤਾ ਸਤ ਜੀ ਮਰਿਆਦਾ ਪੂਰੀ ਜੇ ਹੈਗੀ ਆ ਤੇ ਨਾਮਧਾਰੀਆਂ ਕੋਲ ਕੋਈ ਸੰਸਤਾ ਕਹਿ ਨਹੀਂ ਸਕਦੀ ਜੇ ਮਰਿਆਦਾ ਹੈ ਆ ਦੇ ਤਾਰਾ ਤੋਂ 52 ਦੇ ਸਤਿਗੁਰਾਂ ਨੇ ਅਮਰਦਸ਼ਾਇਆ ਭੈਣੀ ਸਾਹਿਬ ਤੇ ਪ੍ਰਸ਼ਾਦਾ ਆਪ ਕਾਗੇ ਛਗਣਾ ਮਰਿਆ ਦਾਜ ਮਾਦਾ ਇੰਦਕੌਰ ਤੇ ਖੇਮਕੌਰ ਨੇ ਸਗੂ ਰਾਸੇ ਸਜੇ ਬਾਸ਼ ਆਗੇ ਬੇਨਤੀ ਕੀਤੀ ਇਹ ਗਰੀਬ ਰਵਾ ਸਾਨੂੰ ਜੀਵਨ ਗੱਦ ਲਈ ਦਿੱਤਾ ਸੀ ਫਿਰ ਜਸੀ ਆਪਣੇ ਪਤੀ ਦੀ ਸੇਵਾ ਨਹੀਂ ਕਰ ਸਕਦੀਆਂ ਪ੍ਰਸ਼ਾਦਾ ਨਹੀਂ ਪਕਾ ਸਕਦੀਆਂ ਸਾਨੂੰ ਕਾਲੀ ਇਹ ਜੀਵਨ ਦਿੰਦਾ ਹੈ ਸਤਗੁਰਾਂ ਨੇ ਫਿਰ 1863 ਦੇ ਵਿੱਚ ਪਿੰਡ ਸਿਆੜ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸਤਗੁਰਾਂ ਨੇ ਫਿਰ ਬੀਬੀਆਂ ਨੂੰ ਅਮਰਦਸ਼ਿਕਾਇਆ ਸੰਤ ਜੀ ਕਹੇ ਗੁਰੂ ਨੇ ਅੱਜ ਜੋ ਮਰਜੀ ਆਖੀ ਜਾਣ ਦਮ ਗੇਰੇ ਮਾਰੀ ਜਾਣ ਸਾਡੇ ਇੰਡੀਆ ਦੇ ਪੰਜਾਬ ਦੇ ਇੱਕ ਬਾਬਾ ਤੁਰਿਆ ਟਡਰੀਆਂ ਆਲਾ ਉਹ ਕਹਦੇ ਅੱਜ ਅਸੀਂ ਪੜਿਆ ਹੀ ਨਹੀਂ ਕਿ ਮਾਦਾ ਗੁਜਰ ਕੋਰੇ ਉਹ ਮਾਦਾ ਗੁਜਰ ਕੋਰੀ ਕੋਈ ਕਹਿੰ ਜਾਂਦਾ ਮਾਦਾ ਗੁਜਰੀ ਨਹੀਂ ਲੀਗ ਦੇ ਫਕੀਰ ਬਣੀ ਫਿਰਨੈ ਲੋਕ ਆਪਣੇ ਕੋਲ ਬਣਾਈ ਜਾਂਦੇ ਮਰਿਆਦਾ ਆਪਣੇ ਕੋਲ ਹੀ ਨਾਂ ਰੱਖੀ ਜਾਂਦੇ ਆ ਇਸ 사ਗੁਰਾਮ ਸੇ ਜੀ ਦੀ ਦੇਣ ਆ 사우ਰਾਂ ਸੇਸਾ ਜੀ ਪਾਸ਼ਾ ਨੇ ਪਿੰਡ ਸਿਆੜ ਦੇ ਵਿੱਚ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਫਿਰ ਕਿਹਾ ਤੁਸੀਂ ਖੰਡ ਬਾੜ ਕਰੋਗੇ ਆ ਨੇਸੀ ਵਰਨੀਆ ਜੇ ਲੱਗਦੀ ਆਉਂਦੇ ਨਹੀਂ ਸਕਰ ਉਹਨੇ ਲਾਇਆ ਪਹਿਲਾਂ ਸੱਚੇ ਬਾਦਸ਼ਾਹ ਫਿਰ ਮਾਦਾ ਭਪਿੰਦਰ ਕੌਰ ਨਹੀਂ ਕਹੇ ਸੱਚੇ ਬਾਦਸ਼ਾਹ ਆਜਾਤ ਬੀਬੀਆਂ ਵੀ ਵਰਨੀ ਦੇ ਵਿੱਚ ਲੱਗਣ ਇਹ ਵੀ ਹਮਨ ਕਰ ਲੈਣ ਇਹ ਵੀ ਪ੍ਰਯੋਗ ਕਰ ਸਕਣ ਸੱਚੇ ਬਾਦਸ਼ਾਹ ਕਹਿੰਦਾ ਨਹੀਂ ਮੈਂ ਕਾਈ ਵੀ ਜਾਮਾ ਪਤਾ ਨਹੀਂ ਕਰਦਾ ਪਲੀਜ਼ ਹੋ ਜੇ ਪਰ ਮੈਂ ਕਹਿੰਦੇ ਤਾਂ ਮੈਂ ਕਰ ਦਿੰਦਾ ਐ ਇਸ ਗੋਲ ਨੇ ਫਿਰ ਹੁਣੇ ਆਜਾਤ ਦਿੱਤੀ ਸਾਨੂੰ ਹਰੂ ਦਾਸ ਸੱਜੇ ਪਾਇ ਨੇ ਸਾਡੀ ਨਵੇਕਲੀ ਪਛਾਣ ਬਣਾ ਦਿੱਤੀ ਦਸੋਂ ਪਾਸ਼ਾ ਤੋਂ ਬਾਅਦ ਫਿਰ ਨਵੇਕਲੀ ਪਛਾਣ ਬਣਾ ਦਿੱਤੀ ਆ ਨਵੇਕਲੀ ਪਛਾਣ ਜੇ ਸੰਤ ਜੀ ਕਿਸੇ ਗੱਲ ਦੇ ਵਿੱਚ ਕੁਮਾਰਾ ਵੇਖੀ ਨਾ ਕਿਸੇ ਕਿਰਪਾਨਾ ਜਰੂਰ ਸਾਰੇ ਪਾਈ ਫਦੇ ਕੁਰਬਾਨ ਦੀ ਮਹੱਤਤਾ ਦਾ ਨਹੀਂ ਇਹ ਤੱਕ ਲੋਕਾਂ ਨੂੰ ਪਤਾ ਲੱਗਾ ਨੂੰ ਗਏ ਬੱਚਿਆਂ ਨੂੰ ਕੋਈ ਫਿਰਨੀਆਂ ਬੀਬੀਆਂ ਵੱਡਾ ਬੱਚਾ ਦਾ ਓਡੀ ਕੁਰਪਾਨ ਗੱਲ ਪਾਈ ਹੁੰਦੀ ਏ ਸੱਚੇ ਬਾਦਸ਼ਾਹੀ ਅਮਰਤ ਸਿਖਾ ਗਏ ਆਪਣੇ ਸਿਖਾ ਨੂੰ ਇਹ ਗਿਆ ਸਿੱਖੋ ਟਾੜੀਆਂ ਵਿੱਚ ਪਛਾਣ ਬਣਾ ਦਈਏ ਕਿਹੜੀ ਜੀ ਚਿੱਟੇ ਸਾਬ ਕੱਪੜੇ ਸ ਵੀ ਦਸ ਤਾਰ ਗਲੇ kirpanan asi vi pehla paunde hunde ha aakhir vi aa kirpan paayi nahi ki kade eh saahu upar daav sanghi ne sanu band kita he murghi oh khende o keh garib di assi rakhiya nahi kar sade kirpan gal baage ਤਿੱਜਾਪੁਰ ਬਏ ਸਾਡਾ ਸਨ 1919 ਦੇ ਵਿੱਚ ਜਰਨਲਡ ਦੇ ਜਲਸਾ ਕਰ ਰਿਆ ਸੀ ਜਲੰਧਾ ਵਾਲੇ ਬਾਗ 13 April ਨੂੰ ਹੀ ਇਹਨੇ ਉਥੇ ਸੱਤ ਜੀ ਗਨ ਮਸ਼ੀਨਾ ਉਥੇ ਫਿਟ ਕਰਕੇ ਬਸ ਸਿੱਖਾਂ ਦੇ ਉੱਤੇ ਫਿਰ ਇਹਨੇ ਨੇ ਫਿਰ ਉਥੇ ਗੋਲੀਆਂ ਚਲਾਈਆਂ ਉਹਦੇ ਵਿੱਚ ਇਕਲੌਤੀ ਮਾਦਾ ਸੀ ਇਕ ਉਹਦਾ ਇਕਲੌਤਾ ਸੀ ਉਹ ਮਿਰੜੇ ਕਰਦੀ ਆ ਇਹ ਜਿਹੜਾ ਉਦਮ ਸਿੰਘ ਸੀ ਨਾ ਕੋ ਬਦਲਾ ਲਿਆ ਮਿਲ ਪਿਆ ਉਹਨੂੰ ਮਾਈ ਨੂੰ ਕਹਿੰਦਾ ਮਾਦਾ ਕੀ ਗੱਲ ਆ ਕਹਿੰਦੀ ਵੇ ਪੁੱਤ ਕੀ ਦੱਸਾਂ ਇਕੋ ਇੱਕ ਪੁੱਤ ਸੀ ਉਹ ਜਲਿਆਂਵਾਲੇ ਬਾਗ ਦੇ ਵਿੱਚ ਅਗਰੇਜ ਨੇ ਮਾਰ ਦਿੱਤਾ ਗੋਲੀਆਂ ਚਲਾਜ ਲਾ ਕੇ ਉੱਥੇ ਉਦਮ ਸਿੰਘ ਪੜਦਾ ਸੀ ਇਹਦੀ ਅੱਖ ਨੂੰ ਟੁੰਬਿਆ ਕਹਿੰਦਾ ਮਾਦਾ ਆਸ਼ਾ ਜੇ ਕਦੇ ਸਮਾਂ ਆਇਆ ਤਾਂ ਤੈਨੂੰ ਇਹਦਾ ਬਦਲਾ ਲੈ ਕੇ ਦੱਸ ਦਵਾਂਗੇ ਬੰਦੇ ਉਹ ਨਾ ਮਾਦਾ ਮਿਲਦੀ ਹੋ ਸਕਦਾ ਉਦਮ ਸਿੰਘ ਨਾਂ ਇਹ ਸਟੈਂਡ ਲੈਂਦਾ ਉਹਦਾ ਬਦਲਾ ਲਿਆ ਫਿਰ ਉਦਮ ਸਿੰਘ ਨੇ ਸੰਤ ਜੀ ਫਿਰ ਜਨਰਲ ਡਾਇਰ ਨੂੰ ਫਿਰ ਗੋਲੀਆਂ ਮਾਰੀਆਂ ਉਹਨੇ ਇਹ ਤੈਨ ਪਰ ਬਨੇ ਸਾਡੇ ਤੇ ਹੁਣ ਇਧਰਨੇ ਪਾਸੇ ਆਜੋ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੋ ਜੀ ਮੇਰਾ ਕਹਿਮ ਸਾਹਿਬ ਕਿਉਂ ਨਾ ਬਾਦੀ ਮੇਰਾ ਪਰ ਹੁਣ ਮੈਂ ਪ੍ਰਸੰਗ ਸ਼ੁਰੂ ਕਰ ਲਿਆ ਮੈਨੂੰ ਕਰ ਲੈ ਜਾਂਦੇ ਹੋ ਕਦ ਨਾਲ ਹੀ ਮੈਂ ਹੋ ਲਗਿਆ ਉਹ ਤੇ ਤੁਹਾਡੇ ਕੋਲ ਮਿਲਦਾ ਕਿ ਨਹੀਂ ਮਿਲਦਾ ਸ਼ੁਰੂ ਕਰਨ ਲੱਗੇ ਹਾਂ ਜੀ ਮੇਰਾ ਸਤ ਗੁਰ ਪੂਰਾ ਵੈਦ ਹੈ ਸਤ ਗੁਰ ਪੂਰਾ ਵੈਦ ਹੈ ਆ ਜੀ ਸੇ ਸੱਚੇ ਪਾਤਸ਼ਾਹ ਦੁਖੀਆਂ ਦੇ ਦੁੱਖ ਹਰਨ ਵਾਲੇ ਸੰਤ ਜੀ 300 ਬੈੱਡ ਦਾ ਅਪੋਲੋ ਹਸਪੀਟਲ ਆ ਉੱਥੇ ਮੰਜਾਂ ਨੀ ਲੱਭਣ ਡਿਆ ਸੰਤ ਜੀ 28 ਤੀਨ ਨੂੰ ਨਿਕਾਢਣ ਕੀ ਤਾਂ ਆ ਸਤਨਾਬ ਸਿੰਘ ਜੀ ਦੇ ਪਿਤਾ ਜੀ ਗਏ ਅਥੇ ਦਾਖਲ ਹੋਣ ਵਾਤੇ ਉੱਥੇ ਬੈੱਡ ਨਹੀਂ ਗਿਆ ਬੜਿਆ ਸੁਭਾ ਸੁਖਦੇਵ ਸਿੰਘ ਜੀ ਸਨ ਸੁਖਦੇਵ ਸਿੰਘ ਦੇ ਭਾਰੇ ਇਹਨਾਂ ਦੇ ਪਿਤਾ ਦਾ ਨਾਮ ਬਲਵੰਤ ਸਿੰਘ ਤੇ ਇਹਨਾਂ ਦਾ ਤਾਇਆ ਹੀ ਜਿਹੜਾ ਸਦਾਗਰ ਸਿੰਘ ਸੀ ਸਰ ਜੀ ਇਹ ਤਾਇਏ ਦੀ ਅੱਖਾਂ ਦੀ ਜੋਤ ਚਲੇਗੀ ਸਾਡੇ ਸਿੱਖ ਹੈਗੇ ਨੇ ਕਿੰਤੂ ਕਰਦੇ ਨੇ ਆਪਾਂ ਸਤਿਗੁਰੂ ਦੇ ਕਿੰਤੂ ਕਰਦੇ ਆਪਾਂ ਬੜੇ ਇਲਾਜ ਕਰਾਏ ਸੰਤ ਜੀ ਕਹਿੰਦੇ ਜੇਦਾ ਫਿਰ ਕੋਈ ਨਹੀਂ ਨਾ ਫਿਰ ਉਹਦਾ ਫਿਰ ਸਤਿਗੁਰੂ ਸਾਰੇ ਥਾਵਾਂ ਤੋਂ ਘੁੰਮ ਆਏ ਇਹ ਫਿਰ ਆਏ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਫਿਰ ਇਹ ਸੰਤ ਬਲਵੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਕੋਲ ਅਰਜ਼ੀ ਕਰਦੇ ਕਹਿੰਦੇ ਆ ਮੇਰੇ ਸਾਤ ਗੁਰਾਂ ਮੈਂ ਤੁਝ ਕੋਈ ਮੈਂ ਤੁਝ ਬੇ ਸ਼ੇ ਭਾਸ਼ਾ ਭਰਾ ਦੀ ਅੱਖਾਂ ਦੀ ਜੋਤ ਚਲੇਗੀ ਆ ਬੜੇ ਆ ਜਵਾਬ ਮਿਲ ਗਿਆ ਸਾਰਾ ਤੁ ਜਿਵੇਂ ਕਮਣ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਜਦੋਂ ਸਾਰੇ ਹੀ ਆਸਰੇ ਫਿਰ ਮੁੱਕ ਜਾਂਦੇ ਆ ਨਾ ਬੰਦੇ ਦੇ ਫਿਰ ਫੇਰ ਉਹ ਤੁਰਦਾ ਫਿਰ ਗੁਰੂ ਵਾਲੇ ਪਾਸੇ ਫਿਰ ਸਭੋ ਪਜੇ ਆਸਰਾ ਚੁੱਕੇ ਸਬ ਅਸਰਾਓ ਜਿਤੇ ਆਵੇਂ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਓ ਗਰੀਬ ਨਵਾਜ ਵੱਡੇ ਭਰਾ ਦੀ ਅੱਖ ਦੀ ਜਿਹੜੀ ਆ ਜੋ ਚਲੇਗੀ ਇਲਾਜ ਕਰਾਇਆ ਆ ਰਾਮ ਨਹੀਂ ਆਇਆ ਕਹਿੰਦੇ ਉਹੀ ਸੰਤ ਜੀ ਸਾਧਗੁਰੂ ਜੀ ਦਾ ਕਿਰਪਾ ਕਰਦਾ ਨਾ ਫਿਰ ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਦਾਰੇ ਦਰਸ਼ਨ ਪੈਡ ਦੋਹਦ ਨਿਹਾਲਾ ਗੁਰਗਾ ਸਭ ਨੇ ਮੇਰਾ ਬਾਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਤੇ ਕਾਟੇ ਜਮ ਕੀ ਫੰਦਾ ਵੈਦਣਾ ਵੈਦ ਆਉਖਾ ਤੇ ਕਿਹੜੀ ਜਿੰਦਾ ਉਹ ਮੁੱਖ ਤੋਂ ਆਉਖਦ ਦਿੰਦਾ ਆ ਸੰਤ ਜੀ ਹਰ ਹਰ ਆਉਖਾ ਤੇ ਮੁੱਖ ਦੇਵੇ ਸੱਚੇ ਬਾਦਸ਼ਾਹ ਕਹਿੰਦੇ ਇਦਾਂ ਕਰੋ ਹੁਣ ਚਾਰ 5 ਫੁੱਟ ਡੂੰਗਾ ਟੋਆ ਕੱਢ ਲਓ ਉਤਲੀ ਮਿੱਟੀ ਕੱਢ ਲਓ ਸਾਰੀ ਉਤੋਂ ਵੇਖ ਲਓ ਨੁਕਸਾ ਕਿੱਡਾ ਹਲਾ ਸੱਚੇ ਬਾਸ਼ਾ ਦੇ ਲੱਗੇ ਸਗਰੂ ਜੀ ਸਿੰਘ ਜੇ ਮੈਂ ਝੂਠ ਬੋਲਾਂ ਬੇਸ਼ੱਕ ਸਵਰੇ ਟੈਲੀਫੋਨ ਕਰ ਲਓ ਸਕਦੇ ਐ ਜੀ ਨੂੰ ਦਿੱਲੀ ਮਿੱਟੀ ਫੁੱਟ ਡੂੰਗੇ ਟੋਏ ਦੇ ਵਿੱਚੋਂ ਇਹਦਾ ਕਰੋ ਇਹਦੀ ਧੌਣ ਦੇ ਬੰਨੋ ਇਥੇ ਇਹਦੀ ਤਾਂ ਹੁੰਦੇ ਬੰਨੀ ਜਾਓ ਸੰਤ ਜੀ ਕੀਤਾ ਫਿਰ ਜੋ ਕਿਹਾ ਸਤਿਗੁਰੂ ਨੇ ਮੈਂ ਅੱਗੇ ਕਿਹਾ ਜੋ ਸਤਿਗੁਰੂ ਕਹਿੰਦਾ ਉਹ ਕਰੋ ਸਜੇਪਾ ਸ਼ਾਹੀ ਜੀ ਦੀ ਕਿਰਪਾ ਦੇ ਨਾਲ ਸੰਤ ਜੀ ਆਖੋ ਧੰ ਸਤਿਗੁਰੂ ਜੀ ਸਿੰਘ ਮਿੱਟੀ ਬਨਣ ਦੇ ਨਾਲ ਸੰਤ ਜੀ ਗਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਲਾਵਣ ਹਾਰੋ ਜਾਨੇ ਸਤਿਗੁਰੂ ਦਾ ਹੁਕਮ ਆ ਮੋ ਜਦੋਂ ਖੁਦ ਤੇ ਉਹ ਇਹਨਾਂ ਬਰ ਕਹੀਦਾ ਆ ਵੀ ਗੱਲ ਕਹਿਲਾ ਆ ਵੀ ਕਹਿਲਾ ਤੇ ਸਮਾਵਨੀ ਕਹਿਲੇ ਜਾਤ ਦੇ ਦਿੰਦਾ ਕਿਰਾ ਸਤਿਗੁਰੂ ਜੀ ਨੇ ਗੜ ਗੜਨੀ ਵਾਲਾ ਸ਼ਹਿਰ ਬੁਰਜਲੇ ਦੇ ਵਿੱਚ ਬੜਾ ਤਗੜਾ ਦਾਇਤ ਰਹਿੰਦਾ ਸੀ ਸੇਖਾ ਨੂੰ ਕੱਲੇ ਆਪਾਂ ਇਹਦਾ ਕੋਈ ਵਰਨੀ ਕਰਨੀ ਹੈ ਚੰਡੀ ਦੀ ਵਾਰ ਦੀ ਉੱਥੇ ਦੋ ਵਰਨੀਆਂ ਕਰਨੀਆਂ ਸਤ ਜੀ ਵਰਨੀਆਂ ਕੀਤੀਆਂ ਚੰਡੀ ਦੀ ਮੱਥਾ ਡੇਗਿਆ ਸਾਰੇ ਵਰਨੀ ਵਾਲੇ ਜਿੰਨੇ ਸਨ ਤੇ ਸਿਆਲ ਦੇ ਦਿਨ ਸਨ ਕਈ ਸਾਡੇ ਗਰਮੀਆਂ ਦੀ ਭੱਜ ਜਾਂਦੇ ਆ ਜਿਹੜੇ ਸਿੱਖ ਚਨਾਲ ਕਰਨਾ ਸੌ ਸੌ ਮੱਥਾ ਦੇ ਗਿਆ ਤੇ ਜਿਹੜਾ ਆਗੂ ਸੀ ਨਾ ਕਹਿੰਦਾ ਉਹ ਪੈਸੇ ਸਾਰੇ ਇਕੱਠੇ ਕਰ ਲੋ ਕਈ ਆਉਂਦੇ ਮਾਰੀਆਂ ਹੁੰਦੀਆਂ ਵੀ ਅਸੀਂ ਇਹਦੇ ਹੁਣ ਆਏ ਸਾਨੂੰ 100-100 ਉੱਥੇ ਆਪਣੇ ਟਰੈਕਟਰ ਚਲਾਉਂਦਾ ਆ ਭੈਣੀ ਸਾਹਿਬ ਉਹਨੇ 100 ਰੁਪਈਆ ਨਾ ਦਿੱਤਾ ਆਪਣੇ ਸਾਲੇ ਨੂੰ ਜਿਹੜਾ ਬਾਕੀਆਂ ਨੇ ਪੈਸੇ ਦੇਦੇ ਸਤਗੁਰਾਂ ਦੇ ਅੱਗੇ ਹਜੂਰੀ ਉਹਨੇ ਸਾਰੇ ਮੱਥਾ ਟੇਕ ਦਿੱਤਾ ਉਹਨੂੰ ਉਹਨੇ 100 ਰੁਪਇਆ ਨਾ ਦਿੱਤਾ ਬਣਵਾਈਏ ਨੇ ਸੱਜੀ ਜੀ ਫਿਰ ਦੂਜਾ ਦਿਨ ਹੋਇਆ ਫਿਰ ਚੜਿਆ ਅਕੜੇ ਵਾਂ ਨੂੰ ਫਿਰ ਢਿੰਗੇ ਫਿਰ ਸੱਜੀ ਜੀ ਕੋਈ ਨਹੀਂ ਕੋਈ ਇਹਦੇ ਤੈਨੂੰ ਕੀ ਕਹਿੰਦੇ ਪੈਸੇ ਜਿਹੜੇ ਬੜੇ ਭਾਰੀਆਂ ਹੁੰਦੀਆਂ ਚੀਜ਼ਾਂ ਜਿਹੜੀਆਂ ਬੜੀਆਂ ਭਾਰੀਆਂ ਹੁੰਦੀਆਂ ਤੂੰ ਨਹੀਂ ਮੰਨਿਆ ਅੰਦਾ ਲਿਆਰੇ ਚੰਗਾਰਾਂਗੇ ਲਿਆ 100 ਰੁਪਇਆ ਸੱਜੀਓ ਮਥਾ ਲੈ ਗਿਆ ਸਾਧਗੁਰੂ ਨਾਲ ਜਾ ਕੇ ਉਹਨੂੰ ਆਰਾਮ ਆਇਆ ਉਹਦੀ ਸਦਾਗਰ ਸਿੰਘ ਦੀ ਅੱਖਾਂ ਦੀ ਜੋਤ ਆ ਗਈ ਸਤਿਗੁਰੂ ਦੇ ਹੁਕਮ ਦੇ ਨਾਲ ਸੰਤ ਜੀ ਨੇਤਰ ਪ੍ਰਗਾਸ ਕੀਆ ਗੁਰਦੇਵਾ ਸਭੋ ਪਜੇ ਆਸਰਾ ਕਹਿ ਲੀਏ ਸਾਰੇ ਜੇ ਭੈ ਜੀ ਤੁਸੀਂ ਮੇਰਾ ਸਾਥ ਦੇ ਮੈਂ ਬੜਾ ਤੁਹਾਡਾ ਧੰਨਵਾਦ ਕਰੂੰਗਾ ਇੱਕ ਵਾਰਸੇ ਆਪਾਂ ਜਿੱਦਾਂ ਜੋਟੀਆਂ ਸ਼ਰਮ ਤੁਸੀਂ ਪੜ ਲਓ ਇੱਕ ਵਾਰਸੇ ਸਾਹ ਸਿੱਧਰ ਪੜ ਦਿੰਦੀ ਆ ਵੜਦਾ ਆਪਾਂ ਸਤਿਗੁਰੂ ਦੇ ਨਮੇਤੀਆਂ ਕਹਿੰਦੇ ਆ ਉਹ ਜੀ ਸਾਰਾ ਜੱਗ ਢੂੰਡਿਆ ਦੇ ਵੈਦ ਨਹੀਂ ਲੱਭਿਆ ਵੈਦ ਲੰਬਾ ਪੈਣੀ ਸੇਭ ਜਾ ਨੀ ਸੰਗ ਵੈਦ ਲੰਬਾ ਪੈਣੀ ਦੇ ਨਾਲ ਹੀ 네ਤਰ ਕੀਆ ਗੁਰਦੇਵ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈ ਰਿਆ ਤੇ ਪੂਰਨ ਸਤਗੁਰ ਗਿਆਨ ਜਿੱਦ ਘਟੇ ਵਸੇ ਪਰਮ ਬ੍ਰह्म ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਆ ਬਈ ਅਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਰਾਗ ਓਟ ਤੇਰੀ ਜਗ ਜੀਵਣਾ ਮੇਰੇ ਠਾਕਰ ਅਗਮ ਆਜਾਦ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਮੇਰਾ ਬੈਦ ਗੁਰੂ ਗੋਬਿੰਦ ਸੰਤ ਜੀ ਘਟ ਘੜ ਦੀ ਵਾਲਾ ਬੜੀ ਠੰਡੀ ਮੂਰਤ ਆ ਸੱਚੇ ਪਾਸ਼ਾ ਸਿਆਸੀ ਅੰਮ੍ਰਿਤ ਵੇਲੇ ਆਏ ਆਸਾ ਦੀ ਵਾਰ ਦੇ ਵਿੱਚ ਜਦੋਂ ਆਏ ਨਾ ਤੇ ਪੰਡਾ ਕੋਪਾਲ ਸਿੰਘ ਜੀ ਬੈਠੇ ਨੇ ਤੇ ਬੋਕੜ ਮਾਰੀ ਆ ਤੇ ਪੈਰਾਂ ਨੂੰ ਹੱਥ ਪਾਇਆ ਮੇਰੇ ਪੈਰਾਂ ਨੂੰ ਹੱਥ ਪਾ ਕੇ ਬੈਠੇ ਨੇ ਸੱਚੇ ਪਾਤਸ਼ਾਹ ਅੰਦਰ ਜੇ ਜਾਣ ਗਿਆ ਤੇ ਪੰਡਾ ਜੀ ਨੂੰ ਠੰਡ ਲੱਗਦੀ ਲੱਗਦੀ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਹ ਗਰਮ ਹਵਾ ਵਾਲਾ ਜਿਹੜਾ ਪੱਖਾ ਨਾਲ ਲੈ ਕੇ ਲਿਆ ਕੇ ਨਾ ਪੰਡਾ ਜੀ ਦੇ ਇਧਰ ਲਾ ਦੇ ਗਰਮ ਹਵਾ ਵਾਲਾ ਤੇ ਪੰਡਤ ਜੀ ਕਹਿੰਦਾ ਹੈ ਗਰੀਬ ਨਾ ਸੱਚੇ ਪਾਸ਼ਾ ਤਿੰਨ ਅੰਤਰ ਜਾਮੀ ਨਾਖਾ ਦਾ ਕੀ ਆਖਾ ਪਰ ਤਿੰਨ ਅੰਤਰ ਜਾਮੀ ਨਾਖਾ ਦਾ ਕੀ ਆਖਾ ਤੈਨੂੰ ਮੈਂ ਸੋ ਸਾਥ ਸੰਗਿਓ ਹਾਂਜੀ ਪੜ ਲਓ ਤੇ ਦੋਨ ਤੋਂ ਸੰਗ ਉਹ ਸੱਚੇ ਪਾਸ਼ਾ ਜੀ ਦੀ ਜਿਵੇਂ ਇਹ ਕਮਣ ਗੁਣ ਕਹੀਏ ਕੋਈ ਗੱਲ ਨਹੀਂ ਪਰ ਆਪਾਂ ਅਫਦਨ ਨੇ ਆਪਾਂ ਕਾਲੂ ਜੀ ਦਾ ਰਾਤ 11:00 ਜਿਹੜਾ ਦੀਵਾਨ ਹੁੰਦਾ ਸੀ ਨਾ ਸੰਤ ਜੀ ਫਿਰ ਕਹਿੰਦੇ ਦਾ ਦੀਵਾਨ ਨਹੀਂ ਹੁੰਦਾ ਜਦੋਂ ਆਸਾ ਦੀ ਵਾਰ ਦਾ ਫਿਰ ਉਹ ਹੀ ਹੁੰਦੇ ਸਨ ਸੰਤ ਅਤਰ ਸਿੰਘ ਜੀ ਆਪਾਂ ਪਾਤਸ਼ਾਹ ਸਾਗਰੂ ਜੀ ਸਿੰਘ ਜੀ ਆਮ ਦੱਸ ਕੇ ਤਾਂ ਜਦੋਂ ਇਹ ਗੱਦੀ ਦੇ ਬੈਠੇ ਹਨ ਸੱਚੇ ਪਾਤਸ਼ਾਹ ਤੇ ਦੌਰੇ ਆਰੰਭ ਕੀਤੇ ਸੱਚੇ ਪਾਤਸ਼ਾਹ ਜੀ ਨੇ ਤੇ ਇਹ ਗਵਾਲੀਅਰ ਗਏ ਨੇ ਸੱਚੇ ਪਾਸ਼ਾ ਗਵਾਲੀਅਰ ਸੱਚੇ ਪਾਸ਼ਾ ਕੋਠੇ ਦੇ ਉੱਤੇ ਬੈਠੇ ਨੇ ਬੈਠੇ ਨੇ ਇੱਕ ਔਰਤ ਗਵਾਲੀਅਰ ਦੀ ਉਹ ਦੀ ਸਤਨੀ ਉਹਨੇ ਸਾੜੀ ਲਾਈ ਆ ਆਪਣਾ ਜੋ ਵੀ ਉਹਨਾਂ ਦਾ ਕਰਮ ਕਾਟ ਕਰਦੇ ਨੇ ਬਿੰਦੀ ਲਾਈ ਆ ਸੱਚੇ ਪਾਸ਼ਾ ਜੀ ਨੂੰ ਕਦੇ ਵੇਖਿਆ ਆ ਸੱਚੇ ਪਾਸ਼ਾ ਤੋਂ ਸੱਚੇ ਪਾਸ਼ਾ ਜੀ ਬਾਤ ਤੇ ਖੀਰ ਬਣਾ ਕੇ ਲਾਈ ਪਰਦਾ ਜੀ ਉਹ ਬੀਬੀ ਦौरा ਸੱਚੇ ਪਾਸ਼ਾ ਪਹਿਲਾ ਦौरा ਜੀ ਸਾਧਗੁਰਾਂ ਦਾ ਸਤਨੀ ਸਿੰਘ ਨੂੰ ਜਿੰਨੇ ਕਹਾਂ ਰਾਮ ਬਣ ਕੇ ਖਾ ਉਹਨੇ ਰਾਮ ਬਣ ਕੇ ਖਾ ਦਿੱਤਾ ਜੀ ਜਿੰਨੇ ਕ੍ਰਿਸ਼ਨ ਕਹਾਂ ਉਹਨੂੰ ਕ੍ਰਿਸ਼ਨ ਬਣ ਕੇ ਖਾ ਦਿੱਤਾ ਜਿਹਨੂੰ ਸਾਗੂ ਪ੍ਰਤਾਪ ਸਿੰਘ ਕਿਹਾ ਨਾ ਸਾਗੂ ਪ੍ਰਤਾਪ ਸਿੰਘ ਨਹੀਂ ਉਹਦੇ ਨਾਲ ਗੱਲਾਂ ਹੋਰ ਸਨ ਉਹਨੂੰ ਸਾਗੂ ਪ੍ਰਤਾਪ ਸਿੰਘ ਬਣ ਕੇ ਖਾਦਾ ਸੰਤ ਜੀ ਸਾਗੂ ਜੀ ਦੀ ਸਿੰਘ ਸਾਡੇ ਇਲਾਕੇ ਦਾ ਅੰਮਰਸਰ ਦਾ ਸੁਭਾਜੀ ਸਨ ਮੱਖਣ ਸਿੰਘ ਸੇਰੋਂ ਸਾਡੇ ਉਦੋਂ ਅੰਦਰ ਧਰ ਮਸਾਲਾ ਪੌੜੀ ਵਾਲੇ ਚੌਂਕ ਦੇ ਵਿੱਚ ਅੰਮਰਸਰ ਤੇ ਉਹਦੇ ਮੰਦੇ ਵਿੱਚ ਕਿਰਨਾ ਆਈ ਕਹਿੰਦਾ ਉਹ ਗੱਲਾਂ ਨਹੀਂ ਜੋ ਸਾਗੂ ਪ੍ਰਤਾਪ ਸਿੰਘ ਦੇ ਨਾਲ ਸਨ ਗੱਲ ਨਹੀਂ ਗਈ ਉਦੇ ਉੱਤੇ ਸਾਡੇ ਚਵਾਰੇ ਸਾਂ ਤਿੰਨ ਚਾਰ ਸੱਚੇ ਪਾਤਸ਼ਾਹ ਪੌੜੀਆਂ ਜਿਹੜੇ ਉੱਤਰਦੇ ਆਉਂਦੇ ਨੇ ਉਤੋਂ ਥੱਲੇ ਜਿਮਾਰੇ ਤੋਂ ਮੱਖਣ ਸੰਗ ਸਾਮਣੇ ਖਲੋਤਾ ਆ ਸੰਤ ਜੀ ਸਾਗਰੂ ਪ੍ਰਤਾਪ ਸਿੰਘ ਦਾ ਦਸਿਆਣਾ ਜਦੋਂ ਵੀ ਸਾਗਰੂ ਪ੍ਰਤਾਪ ਸਿੰਘ ਜੀ ਤੁਰੇ ਆਉਂਦੇ ਆ ਟੈਹ ਕੇ ਚਰਨਾਂ ਦੇ ਪੈ ਗਾ ਸੂਬਾ ਮੱਖਣ ਸੰਗ ਸਿਰੋ ਮੱਖਣ ਜੋ ਵੀ ਕਹਿੰਦੇ ਕਹਾਂ ਉਹਨੇ ਬਣ ਕੇ ਵਿਖਾ ਦਿੱਤਾ ਜੋ ਖੀਰ ਲਾਇਆ ਜੀ ਨਾ ਬਣਾ ਕੇ ਤੇ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਬੈਠੇ ਸਨ ਕਹਿੰਦੀ ਬਾਬਾ ਖੀਰ ਖਾਓ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਕਿਸੇ ਦਾ ਹੱਥ ਦਾ ਖਾਂਦੇ ਨਹੀਂ ਐ ਤੇ ਮਰਯਾਦਾ ਦੇ ਵਿੱਚ ਰਹਿੰਦੇ ਆਂ ਤੇ ਮਰਯਾਦਾ ਵਾਲੇ ਤੇ ਖੀਰ ਅਸੀਂ ਤੇਰੇ ਕਿੱਦਾਂ ਖਾ ਸਕਦੇ ਆਂ ਸਤ ਨਹੀਂ ਉਹਨ ਕੋਈ ਦਿਸਿਆ ਤਾਂ ਤਾਂ ਹੀ ਲਈ ਨਾ ਖੀਰ ਬਣਾ ਕੇ ਜੋ ਸੱਚੇ ਪਾਤਸ਼ਾਹ ਨੇ ਗੱਲ ਕਹੀ ਵੀ ਅਸੀਂ ਆਪਣੇ ਕੇ ਖਾਂਦੇ ਆ ਕਿਸੇ ਦੇ ਹੱਥ ਦਾ ਨਹੀਂ ਖਾਂਦੇ ਤੇ ਸੱਚੇ ਪਾਤਸ਼ਾਹ ਨੂੰ ਉਹ ਬੀਬੀ ਕਹਿੰਦੀ ਆ ਪਾਸ਼ਾ ਉਦੋਂ ਕਿੱਥੇ ਗਿਆ ਆ ਜਦੋਂ ਝੂਠੇ ਬੀਅਰ ਖਾ ਲਿਆ ਸੀ ਸੋ ਸਾਥ ਸੰਗਤ ਸੱਚੇ ਪਾਸ਼ਾ ਕੀ ਦੇ ਸਿੱਖਾਂ ਨੂੰ ਕਿੰਦਾ ਛਗੋ ਪਈ ਹੁਣ ਛਗੋ ਛਗਣੀ ਪਈ ਸੰਤ ਜੀ ਮੇਰੀ ਬਾਂਦੀ ਭਗਤ ਛੜਾਵੇ ਬਾਂਦੀ ਭਗਤ ਨਾ ਛੂਟੇ ਮੋਏ ਬੰਨ ਲਿੰਦੇ ਜੀ ਭਗਤ ਬੰਨ ਲਿੰਦੇ ਗੁਰੂ ਨੂੰ ਤੇ ਫਿਰ ਗੁਰੂ ਪਤਾ ਕਿੱਦਾਂ ਫਿਰਦਾ ਜਿੰਦਾਂ ਨੇ ਬੰਨ ਲਿਆ ਹੁੰਦਾ ਭਗਤ ਵਛਾ ਲੈ ਹਰ ਬਿਰਦ ਹੈ ਹਰ ਲਾਜ ਰਖਾਇਆ ਉਹ ਫਿਰ ਭਗਤਾ ਦੇ ਮਗਰ ਇਤਰਾ ਫਿਰਦਾ ਜਿਤਰਾ ਫਿਰ ਸੋਮਰਾ ਕਹੇ ਤੋਂ ਭਾਸਾ ਸੰਗਿਓ ਸਤਿਗੁਰੂ ਅੰਤਰਜਾਮੀ ਆ ਜਿੰਨਾਂ ਸਤਿਗੁਰ ਪ੍ਰਖਣਾ ਸੇਵਿਓ ਤੇ ਸਭ ਦਿਨਾਂ ਲੱਗੋ ਪਿਆਰ ਓਏ ਮਾਨਸ ਤੇ ਪਸੂ ਢੋਰ ਗਵਾ ਰੇ ਜਿਨ ਵੇ ਤੱਕ ਪਤਾ ਨਹੀਂ ਲੱਗਾ ਕਿ ਮੇਰਾ ਗੁਰੂ ਸਮਰਾਥਿਆ ਓ ਮਾਸ ਜੂ ਨਹੀਂ ਥੋੜੇ ਆਏ ਨੇ ਕਿੱਦਿ ਸਤਪੁਰਖ ਜਿਨ ਜਾਣਿਆ ਸਤਗੁਰ ਦੇ ਸਕਾਰ ਤੈਸ ਕੇ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਓ ਸਾ ਸੰਗਿਓ ਮੈਂ ਹੁਣ ਇੱਥੇ ਹੀ ਆਪ ਤੋਂ ਖਿਮਾ ਦਾ ਜਾਚ ਗਿਆ ਜੇ ਕੋ ਬੋਲਦਾ ਗਲਤੀ ਹੋ ਗਈ ਤੇ ਮਾਫ ਕਰਨਾ ਤੇ ਫਿਰ ਦੇਖਾਂਗੇ ਅਗਲੇ ਸੈਚਰਡੇ ਨਵੀਂ ਨਦੀ ਨਾਮ ਸੰਜੋਕੀ ਮਿਲੇ ਸਾ ਸੰਗਤ ਦੇ ਦਰਸ਼ਨ ਹੋਣਗੇ